श्लोक माला तीसरा जे सतगुरु सेवा अपना तिसनु पूजे सब कोई सब ना सिर उपाओ है हर नाम प्राप्त होई जे अपने सतगुरु दी सेवा करते वे सेवा दे जेडे गुरुमत तसाल चलदे दे त्रातऊ दी आवाज अंधार दे ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਈ ਕਿਹ ਉਪਾਉ ਹੋਰ ਵੀ ਨੇ ਜਿਹਦੇ ਵਿੱਚ ਉਪਾਉ ਕਹ ਲਏ ਜਿਹੜੇ ਲੋਕ ਧਰਵਾਤੇ ਇਹ ਸਾਰੇ ਉਪਾਵਾ ਉਹਦੇ ਤੋਂ ਸਿਰ ਉਪਾਉ ਹੈ ਸਰੀਰ ਉਪਾਉ ਸਿਰ ਉਪਾਉ ਹੈ ਠੀਕ ਹੈ ਹਰ ਨਾਮ ਪ੍ਰਾਪਤ ਹੋਈ ਕਿਉਂਕਿ ਜੋ ਦੀ ਪ੍ਰਾਪਤੀ ਹੋ ਜਾਂਦੀ ਹੋਰ ਕਿਦੋਂ ਦੀ ਪ੍ਰਾਪਤੀ ਨਹੀਂ ਹੁੰਦੀ ਏਸ ਤੋਂ ਉਪਾਉ ਤੋਂ ਬਿਨਾਂ ਆਬਦੀ ਪ੍ਰਾਪਤੀ ਨਹੀਂ ਹੁੰਦੀ ਇਹਦਾ ਮਤਲਬ ਹੈ ਬਾਲਾ ਫੇਰਨ ਵਾਲੇ ਵੈਰੂ ਵੈਰੂ ਵਾਲੇ ਗੁਰਮਤ ਤੋਂ ਸੇਵਾ ਕਰਨ ਨਾਲ ਹੀ ਨਾਮ ਪ੍ਰਾਪਤ ਹੁੰਦਾ ਹਰ ਨਾਮ ਪ੍ਰਾਪਤ ਹੁੰਦਾ ਜੀ ਜਈ ਠੀਕ ਹੈ ਜੀ ਜਿੱਤੇ ਵੀ ਸਿੱਖ ਕਰ ਰਹੇ ਨੇ ਸਭ ਫੁੱਟ ਹੈ ਠੀਕ ਹੈ ਨਰਮਧੀਆਂ ਪੰਕਤੀ ਕਹਿੰਦੀ ਹੈ ਜੀ ਇਹ 10 ਰੁਪਏ ਪੰਕਤੀ ਦੇ ਅਰਥ ਕਿਵੇਂ ਬਣੇ ਠੀਕ ਹੈ ਜੀ ਕੀ ਬਣਦਾ ਹੈ ਜੀ ਪੰਜ ਅੰਤਰ ਸੀਤਲ ਸ਼ਾਂਤ ਵਸੈ ਜਪ ਸਦਾ ਸੁਖ ਹੋਏ ਅੰਤਰ ਸ਼ਾਂਤੀ ਵਸਾਏ ਅੱਛਾ ਜੀ ਹੋਣਾ ਬਣਦਾ ਸਤ ਉਲ ਬੜੀ ਜਸਤ ਅੰਦਰ ਸੀਤਲਤਾ ਸ਼ਾਂਤੀ ਵਸ ਜਾਂਦੀ ਹੈ ਟਿਕ ਜਾਂਦੀ ਹੈ ਸੰਤ ਬੱਜ ਗਿਆ ਕੱਪੜੇ ਪਾ ਕੇ ਨਹੀਂ ਸੀ ਬੜੀ ਇਸ ਵੀ ਨਾ ਬਣੇ ਕਪੜੇ ਕਹਿ ਲਈ ਹੁਣ ਕੋਈ ਆਉਣਾ ਦੀ ਅੰਤਰ ਸ਼ੀਤਲ ਸ਼ਾਂਤੀ ਵਸੈ ਜਪ ਹਿਰਦੈ ਸਦਾ ਸੁਖ ਹੋਈ। ਜਪ ਹਿਰਦੈ ਸਦਾ ਸੁਖ ਹੋਈ ਨਹੀ ਜਪਦਾ ਹਿਰਦੈ ਸਦਾ ਸੁਖ ਹੋ। ਜਿਉ ਜਿ ਸਮਾ ਹੈ ਅੰਦਰ ਵਿੱਚ ਅੰਮ੍ਰਿਤ ਖਾਣਾ ਅੰਮ੍ਰਿਤ ਪੈਣਣਾ ਨਾਨਕ ਨਾਮ ਵਡਾਈ ਹੋਈ। ਅੰਮ੍ਰਿਤ ਖਾਣਾ ਉਪਰ ਭੰਨੋ ਸਾਚੇ ਖਾਣਾ। ਸੱਚ ਬੈਲ ਉਹਦੋਂ ਕੀ ਹੈ ਸੱਚ ਆਤਮਾ ਦੇ ਲੈਵਲ ਤੇ ਸੱਚ ਖਾਣਾ ਸੱਚ ਕਰਦੇ ਸੱਚੀ ਗੱਲ ਤੇ ਬਿਨਾਂ ਦੀ ਸੱਚ ਮਰ ਜਾਂਦਾ ਖਾ ਲੈਂਦਾ ਹਮੇਸ਼ਾ ਵਾਸਤੇ ਹਜ਼ਰ ਵੀ ਕਰਦਾ ਸੱਚੇ ਪੈਸਾ ਦਾ ਵੀ ਸੱਚ ਹੈ ਸੱਚ ਕਾ ਨਾਮ ਨਹੀਂ ਵਧੀ ਹੈ ਨਾਮ ਵਧੀ ਜਾਂਦਾ ਵਧੀ ਆਇਦਾ ਮਤਲਬ ਹੈ ਨਾਮ ਗਿਆਨ ਵਧੀ ਜਾਂਦਾ ਬਠਾਈ ਹੋਏ ਗਿਆਨ ਦੀ ਆਦਾ ਹੋਈ ਜਾਂਦਾ कि ना, नाम करके वढ़ाई हो रही है कि नाम दी हो रही है नाम करके वढ़ाई नहीं हो रही नामच वादा हो रहे है ज्ञानच वादा हो रहे है सोचीच वादा हो रहे है मोहल्ला तीजा ए मन गुर की सिख सुणा हर पाव पावे गुणी निधान एक फेर लबजा गया सिखदार ते सिखया इथे भी सिक ਇਹ ਮਾਣ ਗੁਰਕੀ ਸਿੱਖ ਸਕੂਲ ਹਾਂਜੀ ਸੁਣੀ ਵਰਪਾਵਾਂ ਕੁਲੀ ਦਾ ਨਾ ਇਹ ਮਾਣ ਜਿਹਨਾਂ ਨੇ ਗੁਰਕੀ ਸਿੱਖਿਆ ਸੁਣੀ ਹੈ ਉਹਨਾਂ ਨੇ ਹਰ ਨਾਮ ਪਾ ਲਿਆ ਉਹਨਾਂ ਨੂੰ ਹੀ ਨਾਮ ਨਿਦਾਨ ਮਿਲਿਆ ਹੈ ਇਹਦਾ ਮਤਲਬ ਅਸੀਂ ਸਿੱਖ ਸੁਣਦੇ ਨਹੀਂ ਹਾਂਜੀ ਜਿਹੜੇ ਅਸੀਂ ਸੁਣਦੇ ਆ ਕਹਿੰਦੇ ਅਸੀਂ ਸੁਣਦੇ ਆ ਹੋਰ ਬਾਣੀ ਸੁਣਦੇ ਜੇ ਸੁਣਨੇ ਸਾਨੂੰ ਇਹ ਨਾਮ ਨਿਦਾਨ ਮਿਲ ਜਾਂਦਾ ਠੀਕ ਹੈ ਅਸੀਂ ਤਾਂ ਸੁਣਦੇ ਨਹੀਂ ਬਾੜ ਸੁਣਦੇ ਨੇ ਸੁਣਨਾ ਜਿਹੜਾ ਗੁਰਬਾਣੀ ਜੀ ਨੂੰ ਸੁਣਨਾ ਬੰਤੀ ਉਹ ਕੁਛ ਗੱਲ ਹੋਰ ਐ ਜਿਹਨੂੰ ਅਸੀਂ ਸੁਣਨਾ ਮੰਨਦਾ ਉਹ ਕੁਛ ਗੱਲ ਹੋਰ ਸਾਦੇ ਸੁਣਨਾ ਬੰਦੁਰ ਦੇ ਨਾਮ ਨਿਧਾਨ ਕੋਲ ਜੀ ਸੁਣਿਆ ਇਹ ਲੋ ਠੀਕ ਹੈ ਜੀ ਹਰ ਜਿਹੜਾ ਹਰੇ ਗੁਣੀ ਨਿਧਾਨ ਗੁਣੀ ਨਿਧਾਨ ਗੁਣੀ ਨਿਧਾਨ ਹਰ ਹਰ ਦੀ ਪ੍ਰਾਪਤੀ ਹੈਗੀ ਹੈ ਬਾਣੀ ਸੁਣਨਾ ਸਿੱਖਿਆ ਇੱਕ ਇੱਕ ਹੋ ਜਾਂਦਾ ਇੱਕ ਤੋਂ ਵੱਡੀ ਤਾਂ ਬੰਬੀ ਹੋ ਕੋਈ ਨਹੀਂ ਇੱਕ ਹੋਏ ਤਾਂ ਉਕਵੇ ਉਕਵੇ ਵਾਲੀ ਸ਼ਕਤੀ ਜਾਂਦੀ ਹੈ ਦੋ ਪਹਾੜ ਸੁਝ ਜਾਂਦੇ ਨੇ ਹਰ ਸੁਖ ਮਨ ਵਸੈ ਹਉਮੈ ਜਾਇਗਮਾਨ ਹਰ ਸੁਖ ਹਰ ਸੁਖ ਦਾਤਾ ਗੁਰ ਦੀ ਬਾਝਟ ਹੈ ਤੇ ਉਹ ਵੀ ਚਲੇ ਜਾਂਦਾ ਗੋਬਲ ਵੀ ਚਲੇ ਜਾਂਦਾ ਨਾਨਕ ਨਜ਼ਰੀ ਪਾਈਏ ਤਾਂ ਆਂ ਦਿਨ ਲੱਗੇ ਧਿਆਨ ਨਾਨਕ ਨਜ਼ਰੀ ਪਾਈਏ ਹਨ ਕਹਿੰਦੇ ਜੇ ਕੁਝ ਨਜ਼ਰੀ ਪਾਈਏ ਜੇ ਕੋ ਦੇਖੀ ਹੋਵੇ ਸਮਝ ਆ ਨਾਨਕ ਗੁਰਮੁਖ ਦੇਖ ਦਿਖਾਏ ਨਜ਼ਰੀ ਪਾਈਏ ਤਾਂ ਆਂ ਦਿਨ ਲੱਗੇ ਧਿਆਨ ਹਾਂਜੀ ਤਾਂ ਦਿਨ ਲੱਗੇ ਧਿਆਨ ਜੇ ਕੁਝ ਦੇਸੀ ਵਿੱਚ ਧਿਆਨ ਪਰੋਥੀ ਜੁੜ ਜਾਂਦਾ ਜੇ ਸੁਰ ਸ਼ਬਦ ਦਾ ਵੇਲ ਹੋਰ ਵਿੱਚ फिर tere reh jaandi hai jud ke je shabd da darshan ho jave shabd da darshan ho jave tu surtru shabd da darshan ho jave je ek ho ke oh kya ve pher ta utthe hi reh jandi hai esdi tu turdi turte hori sat santokh sab sat hai ਅੰਦਰੋਂ ਕਪੜ ਵਿਕਾਰ ਗਿਆ ਮਨ ਸਹਜੇ ਜਿੱਤਾ ਸਤ ਸੰਤੋਖ ਸਭ ਸੱਚ ਸਤ ਸੰਤੋਖ ਜੋ ਇਹ ਤਾਂ ਸਭ ਸੱਚ ਹੈ ਛਕਿੰਦਾ ਖਤਾਈਂ ਗਈ ਕਰਕੇ ਸਤ ਸੰਤੋਖ ਦੀ ਗੱਲ ਕੀਤੀ ਹੈ ਸਤ ਸੰਤੋਖ ਦੀ ਵਿਚਾਰਦਾ ਮਿਹਰਬਾਨੀ ਸਤ ਸੰਤੋਖ ਜੇ ਤੁਹਾਡੇ ਕੋਲ ਉਹ ਸਤੋਖਾ ਜਿਹੜਾ ਫਤ ਹੈ ਹੂੰ ਸੱਚ ਸਰੂਪ ਹੋ ਤੁਸੀਂ ਸੱਚ ਸਰੂਪ ਹੋਗੇ ਤੁਸੀਂ ਆਸਰਾ ਦੇ ਵਿੱਚ ਆ ਗਿਆ ਜਾ ਕੇ ਠੀਕ ਹੈ ਜੋ ਜੁੜ ਗਿਆ ਕੇ ਠੀਕ ਹੈ ਫਿਰ ਉਹ ਮਨਹਾਵਣ ਦੇ ਅਰਥ ਏਸ ਲਾਈਨ ਚ ਪੰਕਤੀ ਚ ਪਾਏ ਹਾਂ ਠੀਕ ਹੈ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤ੍ਰ ਗੁਰਮੁਖ ਵੇੜਾ ਪਵਿੱਤਰ ਹੈ ਠੀਕ ਹੈ ਗੁਰਮੁਖ ਪਵਿੱਤਰਾ ਅਪਵਿੱਤਰ ਹੈ ਗੁਰਮੁਖ ਦੇ ਵੇੜੇ ਅੰਦਰੋਂ ਕਬਟ ਵਿਕਾਰ ਗਿਆ ਮਨ ਸਹਜੇ ਜਿੱਤਾ ਕਿਉਂ ਕੋ ਜਿਹੜਾ ਕਬਟ ਵਿਕਾਰ ਸੀ ਪਹਿਲਾਂ ਪਹਿਲਾਂ ਸੀ ਪੁੱਤਰੋਂ ਜੋ ਕਬਟ ਵਿਕਾਰ ਸੀ ਚਲਾ ਗਿਆ ਖਤਮ ਹੋ ਗਿਆ ਉਦੋਂ ਕਬਟ ਵਿਕਾਰ ਗਿਆ ਮਨ ਸੁਰ ਸਹਜੇ ਜਿੱਤਾ ਜਿੱਤਿਆ ਗਿਆ ਸਹਜ ਅਵਸਥਾ ਜਾ ਗਿਆ ਮਨ ਠੇਕ ਗਿਆ ਜਿੱਤਿਆ ਜਾਂਦਾ ਬੋਲ ਠੇਕ ਜਾਂਦਾ ਕੁន្តែ ਜਿੱਤਾ ਹਾਂਜੀ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਿਆਨ ਗਵਿਤਾ ਤੈ ਉਹ ਜਗਾ ਤੈ ਜੋਤ ਉੱਥੇ ਆਇ ਪੂਰਨ ਜੋਤ ਜਗਾ ਘਟਬ ਪ੍ਰਗਾਸ ਪ੍ਰਕਾਸ਼ ਦੀ ਪ੍ਰਗਾਸ ਹਾਂਜੀ ਅਨੰਤ ਰਸ ਅ ਗਿਆਨ ਗਵਿੱਤਾ ਗਿਆਨ ਦਾ ਨਾਸ ਗੁਰ ਪ੍ਰਸਾਦ ਪਰਮ ਦਾ ਨਾਸ ਇੱਥੇ ਜਾ ਕੇ ਹੁੰਦਾ ਜਗਿਆਨੰਨ ਗੁਰਦੀਆ ਗਿਆਨ ਅੰਧੇਰ ਬਿਨਾਸ਼ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਅੰਧੇਨ ਹਰ ਕੇ ਗੁਣ ਰਵੈ ਫੇਰ ਕਮੈਨੀ ਹੋਰ ਕੋਈ ਇਹ ਜਨਮ ਤੋਂ ਬਾਅਦ ਹੋ ਗਿਆ ਅੰਧੇਨ ਹਰ ਕੇ ਗੁਣ ਰਵੈ ਉਹਦੇ ਹਰ ਦੇ ਗੁਣਾਂ ਦੇ ਵਿੱਚ ਸਬੂਤ ਆ ਰਿਹਾ ਹੈ ਉਹ ਗੁਣਾਂ ਦੇ ਵਿੱਚ ਹੀ ਰਲਦਾ ਖੇਲਦਾ ਉਹ ਗੁਣਾਂ ਸਾਰੀ ਖੇੜ ਗੁਣਾਂ ਦੀ ਖੇੜ ਖੇਲਦਾ ਹੀ ਸੀ ਦਾ ਰੰਗ ਹੋਰ ਚਾਹੁੰਦਾ ਹੈ ਦਾ ਰੰਗ ਹੋਰ ਚਾਹੁੰਦਾ ਹੈ ਹੋਰ ਚਾਹੁੰਦਾ ਹੈ ਹੋਰ ਟੋਕੇ ਚਾਹੁੰਦਾ ਗੁਣ ਨੂੰ ਕੌਣ ਪ੍ਰਗਟ ਕੀਤਾ ਆ ਗੁਣਾਂ ਨੂੰ ਪ੍ਰਗਟ ਕਰ ਦਿੰਦਾ ਇੱਕ ਦਿਨ ਉਹ ਗੁਣ ਪ੍ਰਗਟ ਵੀ ਹੋ ਜਾਂਦੇ ਨੇ ਸਾਬਤ ਵੀ ਹੋ ਜਾਂਦੇ ਨੇ ਕਰਨ ਵਾਲਾ ਹੈ। ਠੀਕ ਹੈ ਜੀ ਉਸ ਤੋਂ ਬਾਅਦ ਹੁੰਨੇ ਆ ਜੀ। ਜਿਆ ਹਿਰਦੇ ਤੋਂ ਬਾਹਰ ਆਉ। ਬੜਾ ਭੜ ਕੇ ਬਾਹਰ ਹੋ ਪਤਾ ਲੱਗੂ। ਬਾਹਰ ਬਿੱਟੇ ਜਦੋਂ ਪਤਾ ਲੱਗੂ ਉਹਦੀ ਗੱਲ 'ਚ ਮੇਰ ਹੈ। ਠੀਕ ਗੱਲ 'ਤੇ ਸਵਾਰ ਹੈ। ਉਹਦੀ ਗੱਲ ਬੁਰੇ ਦਾ ਭਲਾ ਕਰਨ ਵਾਲੀ ਹੈ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਸਭਨਾ ਦਾਤਾ ਏਕ ਹੈ ਸਭਨਾ ਦਾਤਾ ਇੱਕ ਹੀ ਹੈ ਅੱਛਾ ਇੱਕੋ ਵਰ ਮਿੱਤਾ ਇੱਕੋ ਮਿੱਤਰਾ ਸਭ ਦਾ ਧਰਿਆ ਦਾਤਾ ਸਭੇ ਕਾ ਮਿੱਤਰ ਵੀ ਇੱਕ ਹੈ ਲੜਾਈ ਕਣੀ ਗੱਲਦੀ ਹੈ ਗੁਰਮੁਖਾਂ ਲੜਾਈ ਕਣੀ ਗੱਲਦੀ ਹੈ ਦਾਤਾ ਵੀ ਹੋਈ ਹੈ ਮਿੱਤਰ ਵੀ ਹੋਈ ਹੈ ਇੱਕ ਮਿੱਤਰ ਹੋਵੇ ਲੜ ਲੰਦਾ ਦੂਰ ਮਿੱਤਰ ਨਾਲ ਆ ਜਾਂਦਾ ਹੈ ਸਭੀ ਆਦਮਾ ਨਾ ਕੋਈ ਕਿਸੇ ਦਾ ਚਿੱਤ ਬਿੱਤਰਾ ਨਾ ਕੋਈ ਦਾਤਾ ਸਭ ਗੱਲਾਂ ਵਿੱਚ ਹਵਾ ਦੀ ਹੈ ਤਾਂ ਸਤਗੁਰੂ ਕੋਰਾ ਕਰੇ ਜੇ ਸਿਕਰ ਜੇ ਬਾੰਦ ਬਜਾਈ ਥੂਕ ਕਬੀਰ ਨੇ ਕਹਿਤਾ ਅੱਛਾ ਅਧੂਰ ਵੀ ਕੀ ਕਰੂੰਗਾ ਕੁਰਬਾਨੀ ਵੀ ਕੀ ਕਰੂੰਗੀ ਅੰਨੇ ਨੇ ਸਿੱਖਤਾਂ ਵਿੱਚ ਕਿੰਨੀ ਲੱਗਦੀ ਇਹ ਤਾਂ ਬਾਂਹ ਸੁਜਾਈ ਭੂਕਾ ਤਾਂ ਥੋੜੀ ਦੂਰ ਕਰ ਨਿਕਲ ਗਈ ਇੱਥੇ ਜਦੋਂ ਸਭਨਾ ਦਾਤਾ ਏਕ ਹੈ ਲਿਖਦੇ ਆ ਏਕ ਔਰ ਇੱਕ ਚੋ ਫਰਕ ਹੈ ਕਿ ਦੋਹੇ ਇੱਕੇ ਅੱਖਰ ਏਕ ਤੇ ਇੱਕ ਜਰਜੀ ਸਾਹਿਬ ਚਾਹੁੰਦਾ ਨਾ ਦਾ ਇੱਕ ਦਾਤਾ ਸਭਨਾ ਦਾਤਾ ਏਕ ਹੈ ਹੈ ਲੱਗਿਆ ਤੇ ਹੈ ਜੀ ਲੱਗਿਆ ਅੱਛਾ ਹੈ ਲਾਉਂਗਾ ਫਿਰ ਏਕ ਹੈ ਲੱਗੂਗਾ ਮਨ ਦਾਤਾ ਕੱਲਾ ਲਾਉਂਦੇ ਫਿਰ ਇੱਕ ਦਾਤਾ ਇੱਕ ਹੈ ਅੱਛਾ ਜੀ ਹਰ ਮਿੱਤਰ ਤੇ ਹਰੇ ਜਿਹੜਾ ਹੈ ਇਹੀ ਸਭ ਦਾ ਮਿੱਤਰ ਹੈ ਹੈ ਦਾਤਾ ਜਿਹੜਾ ਦਾਤਾ ਬਿੱਤਰੇ ਹੁੰਦਾ ਹੈ ਹੂੰ ਬਿੱਤਰ ਜਾ ਸਕਦੀ ਕੋਈ ਦਾਤਾ ਪਰਮੇਸ਼ਰ ਨੂੰ ਕਿਹਾ ਹੈ ਹਰ ਫਿਰ ਮੂਲ ਨੂ ਕਿਹਾ ਜੀ ਅੱਗੇ ਜਿਹੜੀ ਆਹੀ ਲਾਈਨ ਪੰਕਤੀ ਫਰਕ ਰਿਹਾ ਅੱਛਾ ਜੀ ਫਰਕ ਕੀ ਹੈ ਇੱਕ ਦੁਆਰ ਹੈ ਇੱਕ ਦੇਰ ਇੱਕ ਤਾਂ ਕਹਿ ਰਿਹਾ ਵੀ ਇੱਕ ਤਾਂ ਹੁਕਮ ਕਰ ਰਿਹਾ ਵੀ ਇੱਥੇ ਕਹਿਣ ਵਾਲਾ ਫੜਾ ਦੇ ਉਹ ਕਹਿ ਰਿਹਾ ਠੀਕ ਹੈ ਜੀ ਫੜਾਉਣ ਵਾਲੇ ਨੂੰ ਦਾਤਾ ਮੰਨ ਲਓ ਜੇ ਕਹਿਣ ਵਾਲੇ ਦੇ ਰੂਪਰ ਵੱਡਾ ਕਹਿਣ ਵਾਲਾ ਵੱਡਾ ਉਹ ਹੈ ਜੀ ਦਾ ਹੁਕਮ ਅੱਛਾ ਜੀ ਉਹ ਹੈ ਜੀ ਦਾ ਹੁਕਮ ਠੀਕ ਹੈ ਜੀ ਪਰਮੇਸ਼ਰ ਵੱਡਾ ਹੈਗਾ ਪਰ ਇਹ ਵੀ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਹੋਇਆ। ਉਹ ਉਹਦਾ ਹੁਕਮ ਹੈ। ਠੀਕ ਹੈ। ਉਹ ਕੁੱਤਾ ਇਹ ਸਿੱਧ ਕਰ ਦਿੰਦਾ। ਉਹ। ਉਹਦਾ ਲਾਲਾ ਗੋਲਾ ਹੈ। ਹੂੰ। ਲਾਲਾ ਗੋਲਾ ਠੀਕ ਹੈ ਜੀ।